ਚਲੋਕ ਮਹਲਾ 5ਵਾਂ ਲੱਦਮ ਲੱਬਣ ਹਾਰ ਕਰਮ ਕਰਨਦੋ ਮਾਪਿਰੀ ਇਕੋ ਸਿਰਜਣ ਹਾਰ ਨਾਨਕ ਬੀਆ ਨਾ ਪੱਸੀ ਐ ਲੱਦਮ ਲੱਗਵਾਰ ਅੱਜ ਨੀ ਨੂੰ ਜਿਹੜਾ ਲੱਦੇ ਕੋਈ ਫਾਇਦਾ ਹੋਵੇ ਲੋ ਜਿਹੜਾ ਖੋਇਆ ਹੋਇਆ ਉਹ ਹੀ ਠੀਕ ਹੈ ਜੀ ਜਿਹੜਾ ਖੋਇਆ ਹੀ ਨਹੀਂ ਹੋਇਆ ਲੱਭਣਾ ਕਿਨੂ ਪਰ ਜੋਗੀ ਤਾ ਆਪਣੇ ਆਪ ਨੂੰ ਲੱਭ ਹੀ ਜਾਂਦੇ ਨੇ ਖੋਇਆ ਹੋਇਆ। ਸਰੀਰ ਤੋਂ ਲੱਭਦੇ। ਅੱਛਾ ਜੀ। ਇਹ ਲੱਭਣ ਨੂੰ ਲਾ ਲਿਖਿਆ ਕਿ ਉਹਨਾਂ ਸਵਾਲ ਦੀ ਬੈਕਗ੍ਰਾਉਂਡ ਕੀ ਹੈ? ਜੋਗੀ ਹੀ ਸਰੀਰ ਤੋਂ ਲੱਭਦੇ ਨੇ, ਸਰੀਰ ਤੋਂ। ਉਹ ਜੀਵਤ ਤੋਂ ਬਜਾ ਤੇਰਾ ਮੂਲ ਉੱਤੋਂ ਜਿੱਥੋਂ ਵਿਛੜਿਆ ਉਹਨੂੰ ਲੱਭ। ਹੋਇਆ ਖੋਇਆ ਲੱਭਦਾ ਕੋਈ। ਕਰਮ ਕਰਨ ਤੋਂ ਬਾਪਰੀ ਜੋ ਗੁਰਮਤ ਕਹਿੰਦੀ ਹੈ ਗੁਰਮਤ ਦਾ ਗਿਆਨ ਕਹਿੰਦਾ ਦੇਖੋ ਉਪਦੇਸ਼ ਹੈ ਜੋ ਮਾਤਾ ਹੈ ਜੋ ਗਿਆਨ ਰਪਤ ਹੈ ਜਿਹੜਾ ਨੇ ਕਭ ਕਿਹਾ ਉਹ ਕਰੋ ਉਹ ਦੱਸਣ ਕਿ ਕਿੰਨੂੰ ਲੱਭਣ ਕੀ ਦੇ ਲੱਭਣ ਆਪਣੇ ਆਪੇ ਲੱਗੇ ਕਰਮ ਕਰਨ ਤੋਂ ਬਾਪਰੀ ਠੀਕ ਹੈ ਤਾਂ ਕਿ ਉਹ ਤਾਂ ਪੁੱਛਦੇ ਕਭ ਆਪਣੇ ਆਪੇ ਲੱਗੇ ਠੀਕ ਹੈ ਇੱਕੋ ਸਿਰਜਣਹਾਰ ਨਾਨਕ ਬੀਆ ਨਾ ਪੱਸੀ ਹੈ ਇੱਕੋ ਸਿਰਜਣ ਨਾਲ ਸਿਰਜਣ ਨਾਲ ਤਾਂ ਇੱਕ ਹੈ ਸਭ ਦਾ ਨਾਨਕ ਬੀਆ ਨਾ ਪੱਸੀ ਹੈ ਉਹ ਦੂਜਾ ਤਾਂ ਹੈ ਹੀ ਨਹੀਂ ਕੋਈ ਸੁਣਿਆ ਦੂਜਾ ਤਾਂ ਅਜ ਤੱਕ ਕਿਸੇ ਨੇ ਕਿਹਾ ਹੀ ਨਹੀਂ ਹੈ ਸਿਰਜਣਹਾਰ ਇੱਕ ਆਏ ਇਸ ਗੱਲ ਪਿੱਛੇ ਤਾਂ ਕੋਈ ਦੋ ਰਾਇਆ ਸਹੀ ਹੋਈ ਹੋਈ ਨਹੀਂ ਸਹੀ ਸਿਰਜਣਹਾਰ ਉਹ ਸੱਜਣਾ ਆ ਤੂੰ ਲੱਭੋ ਕੱਲ ਇਹ ਹੈ ਰਜਣਾ ਆ ਤੂੰ ਲੱਭਦੇ ਰਜਣਾ ਆ ਤਦੂ ਆਪੇ ਮਾਇਆ ਜਿਹੜੇ ਤੇ ਆਇਆ ਤਰ ਗਿਆ ਹੋਇਆ ਜੀਵ ਹੈ ਇਹ ਮਾਇਆ ਆਪਣੇ ਆਪ ਨੂੰ ਰੱਖਦੇ ਉਹ ਜਿਹੜਾ ਤੁਹਾਨੂੰ ਸਰੀਰ ਚ ਬਾੜ ਕੇ ਆ ਪਤਾ ਨਹੀਂ ਕਿੱਥੇ ਉਹਨੂੰ ਲੱਭੋ ਕੋਈ ਕੱਢੂਗਾ ਕਿ ਕੱਲ ਰਸਤਾ ਹੋਈ ਗਸੂ ਜਿਹੜਾ ਸਰੀਰ ਚ ਫਸਾ ਗਏ ਆਪੋ ਕਿਤੇ ਚੁੱਪ ਕਰਕੇ ਬਹਿ ਗਿਆ ਨਾ ਉਹ ਬੋਲੂਗਾ ਗੱਡੂ ਦਾ ਥੋੜੂ ਉਹ ਠੀਕ ਹੈ ਆ ਸਰੀਰ ਤੋਂ ਤੁਹਾਨੂੰ ਸੁਰੱਖਿਅਤ ਬੀ ਆ ਨਾ ਪੱਸੀਏ ਤਾਂ ਕੀ ਪਾ ਬੰਦਾ ਜੀ ਉਹ ਦੂਜਾ ਤਾਂ ਹੈ ਹੀ ਬਾਰੇ ਦੋ ਰਹੇ ਦੀ ਠੀਕ ਹੈ ਜੀ ਹੋਇਆ ਆ ਜਿੱਦੀ ਖਸੇ ਉਹ ਕੋਈ ਹੈ। ਅੱਛਾ। ਪੁੱਛ ਰਿਆ ਦੀ ਪਸਾਰਾ ਉਹ ਦਾ ਦੀ ਹੈ। ਮਹੱਲਾ ਪੰਜਵਾਂ ਵਈ। ਪਾਪੜਿਆ ਪਛਾੜ ਬਾਣ ਸੱਚਾਵਾ ਸੰਕੈ ਆ ਪਾਪ ਮਗਰ ਲੱਗੇ ਨਾ ਤੇਰੇ ਪਾਪ ਪਾਪੜਿਆਂ ਨਾਲ ਪਾਪੜੀ ਹੈ। ਹਾਂਜੀ। ਆਪੜੇ ਪਾਪਲਾਂ تیر ਨਾਲ ਉੱਟੋ ਉੱਟੋ ਕ੍ਰੀ ਲਾਣਾ ਵਿਚਾਰ ਨਹੀਂ ਆ ਰਹੀ। ਜਿਹੜੇ ਪਾਪ ਨੇ ਨਾ ਮਗਰ ਲੱਗੇ, ਆਪੇ ਹੁਕਮ ਦਾ ਵਿਰੋਧ ਕਰ ਕਰਨਾ ਹੁਕਮ ਦਾ ਵਿਰੋਧ ਕਰਸਾ ਇਹ ਫੋਲਨਾ ਇਹਨਾਂ ਤੇ ਜਨ ਵੀ ਜਿਹੜਾ ਬੋਨੇ ਆ ਕੰਨ ਚ ਬਾ تیر ਕੰਨ ਸੁਣਦਾ ਦੁੜ ਉੱਠਦਾ ਉਹਦੇ ਕੰਨ ਚ ਹੀ ਮਾਰ ਦੋ ਤੇ ਤੇ ਕੰਨ ਬੰਦ ਹੋ ਜਵੇ। ਪਛਾਤ ਤੀਰ ਗਲ ਕੇ ਰਖੋ ਤੇ ਗੁਰ ਮੰਤਰਾ ਚਿਤਾਰ ਨਾਨਕ ਦੁੱਖ ਨਾ ਥੀ ਵਈ ਗੁਰ ਮੰਤਰਾ ਜਿਤਾਰ ਨਾ ਥੀ ਦਾ ਮਤਲਬ ਇਹ ਨਹੀਂ ਉਚਾਰਨ ਕਰ ਨਾ ਇਹ ਸੁਭਿਤਾ ਰਹੇ ਜੋ ਸੁਭਿ ਹੋਊ ਤੇ ਤੂੰ ਜਾਗ ਬੈਠੇ ਗੁਰ ਬਾਣੀ ਤੇ ਤੈਨੂੰ ਜਗਾ ਦੇਵੇ ਚਿਤਾਰ ਫੇਰ ਪਾਪ ਤਾਂ ਕਰਦੇ ਹੀ ਇੱਕ ਪਾਸੇ ਤਾਂ ਉਹਦੇ 300 ਸੰਗੇ ਰੱਖ ਦੂਏ ਪਾਸੇ ਗੁਰਬਾਣੀ ਨੂੰ ਸੁਣਦਾ ਰਹੇ ਕਲਪਨਾ ਨਾਲ ਆਪੇ ਛੁੱਟ ਜੂ। ਜੇ ਕਲਪਨਾ ਆਪੇ ਛੁੱਟੂ। ਸੁਪਨੇ ਕਰਕੇ ਕਲਪਨਾ ਕਰਦਾ। ਹੋਜੀ ਪੌੜੀ ਬਾਵਾ ਸਰਜਨਹਾਰ ਪਾਈਆਂ ਆਪ। ਬਾਵਾ ਸਰਜਨਹਾਰ ਪਾਈਆਂ ਠੰਡ ਆਪ। ਜਦ ਆਤਮਾ ਠੰਡੀ ਹੋ ਗਈ ਭਾਣ ਪਾਈ ਜਿੱਦ ਅੱਛਾ ਜੀ ਸਰਜਨ ਹਾਲ ਦੀ ਵਾਵਾ ਹੈ ਵਾਵਾ ਸਰਜਨ ਹਾਲ ਮੇਰੇ ਅੰਦਰ ਜੋਤੀ ਪੈਦਾ ਕਰਤੀ ਹੋਈ ਪਿਆ ਸੀ ਨਾ ਵੀ ਸਰਜਨ ਲੱਭ ਵਾਵਾ ਸਰਜਨ ਤੂੰ ਲੱਭਿਆ ਤਾਂ ਹੱਟ ਪਈ ਤਾਂ ਹੋਰ ਥੋੜੀ ਜਾਂਦੇ ਜਿੰਨਾ ਜਦ ਆਪਣੇ ਆਪ ਨੂੰ ਡੋੜਦੇ ਤਾਂ ਨਾ ਜਰ ਭਾਫੜ ਬਣੀ ਜਾਂਦੇ ਬਿਰੋਧੀ ਹਾਂਜੀ ਜੱਦ ਚੌਗੀ ਹੋਜੀ ਜੀ ਜੀ ਗੰਤ ਮਿਹਰਬਾਨ ਤਿਸ ਨੂੰ ਸਦਾ ਜਾਪ ਜਿਹੜਾ ਸਾਰੇ ਜੀ ਜਨਤਾ ਦੇ ਉੱਤੇ ਸਦਾ ਜਪਦਾ ਰਹਿ ਕਰਦਾ ਰਹਿ ਸਾਰੇ ਜੀ ਜਨਤਾ ਤੇ ਜਿਹੜਾ ਖਾਣੂ ਦੇ ਰਿਹਾ ਕਿਰਪਾ ਕਰ ਰਿਹਾ ਰੱਖਿਆ ਕਰ ਰਿਹਾ ਪੈਦਾ ਕਰ ਰਿਹਾ ਸਿਫਤ ਸੁਲਾ ਕਰਦਾ ਸਦਾ ਠੀਕ ਹੈ ਜੀ ਹੋਜੀ दया धारी समरथ चुक के बिलबिलाप नठे ताप दुख रोग पूरे गुरु प्रताप दया धारी सबनाथ या सबनाथ ने दया धारी दी कृपा कीती चुक के बिलबिलाप बिल अब आप सारे चुप के और जे बिलबिलाप नु हां जी बिल लांदे ने सारे लबदा कुछ नहीं ता बिल लांदे इने ਬਿਲਾਪ ਕਰਦੇ ਨੇ ਇਹ ਅਰਦਾਸ ਜਿਹੜੀ ਅਸੀਂ ਕਰਦੇ ਆ ਸੱਚ ਅਰਦਾਸ ਨਹੀਂ ਬਿਲਾਪ ਹੈ ਭੁੱਖ ਵਾਸਤੇ ਕੋਈ ਬੁਗਣਾ ਬਿਲਾਪ ਹੀ ਹੁੰਦਾ ਠੀਕ ਹੈ ਜਾਨਾ ਰੋਦਾ ਹੀ ਆ ਭੁੱਖਾ ਹੋਰ ਕੀ ਕਰਦਾ ਭੁੱਖਾ ਹੋਦਾ ਰੋਦਾ ਹੀ ਹੁੰਦਾ ਬਿਲਾਪ ਹੀ ਹੁੰਦਾ ਅੱਜ ਆਪਾਂ ਨੂੰ ਸਹੀ ਅੱਖਰ ਲੱਭਿਆ ਵੀ ਇਹ ਅਰਦਾਸ ਨਹੀਂ ਹੈ ਇਹ ਤਾਂ ਬਿਲਾਪ ਹੈ ਬਿਲਾਪ ਹੈ ਹੋਰ ਕੀ ਹੈ ਠੀਕ ਹੈ ਜੀ ਨਾ ਹੁਕਮ ਵੀ ਕਹਿੰਦੇ ਸੀ ਆਪਾਂ ਹੁਕਮ ਕਰਦੇ ਆ ਪਰ ਅਸਲ 'ਚ ਹੁਕਮ ਵੀ ਨਹੀਂ ਕਰ ਰਹੇ ਬਿਲਾਪ ਕਰ ਰਹੇ ਆ ਬਲਾਵ ਕਰਦੇ ਨੱਟੇ ਤਾਪ ਦੁਖ ਰੋਗ ਸਾਰੇ ਤਾਪ ਦੁਖ ਰੋਗ ਸਾਰੇ ਭਜ ਗਏ ਪੂਰੇ ਗੁਰ ਪ੍ਰਤਾਪ ਤੇ ਪੂਰਾ ਗਿਆਨ ਹੋ ਗਿਆ ਰੋਗ ਪੂਰੇ ਗੁਰ ਪ੍ਰਤਾਪ ਜਾਂ ਲੱਟ ਕੇ ਤਾਂ ਬਲਾਵ ਕਾਦਾ ਰਹਿ ਗਿਆ ਹੁਣ ਅਰਦਾਸ ਕਾਦੀ ਕਰਦੀ ਅਰਦਾਸ ਕਾਦੀ ਰਹਿ ਗਈ ਅਰਦਾਸ ਉਹ ਜਗਾ ਕਿੱਥੇ ਰਹੀ ਤੇ ਬਲਾਵ ਕਰਦੇ ਨੇ ਨਖਿਆ ਕੁਝ ਵੀ ਨਹੀਂ ਆਉਂਦਾ ਇਸੇ ਖੜੀ ਜੇ ਸੇਖੋਂ ਦੇ ਫੇਰ ਤਾਂ ਬਲਾਵ ਕਰਦਾ ਹੀ ਨਾ ਆ ਗਿਆ ਦਾ ਦੁੱਖ ਦਾ ਡੇਰ ਦਾ ਸਾ ਆਪਣਾ ਠੇ ਕੁਛ ਨਹੀਂ ਰੱਖਿਆ ਕਿਦੋ ਦਰਬਨ ਅਗੇ ਸਦਾ ਮੇਰੀ ਲਿਆ ਹੋ ਠੀਕ ਹੈ ਆਪਣੀ ਰੱਖ ਜੀ ਨਿਵਾਜ ਥਾਪ ਆਪੇ ਲਾਇਨ ਪੜਾਏ ਸਗਲ ਕਾਪ ਕੀਤੀਆਂ ਆਪਣੀ ਰੱਖ ਕੀਤੀ ਇਹ ਆਪਣਾ ਰੱਖਿਆ ਦਾ ਘੇਰਾ ਤੇਰਾ ਹੁਕਮ ਤੇ ਬਿਨਾਂ ਦਾ ਕੋਈ ਭਰੇ ਨਹੀਂ ਸਕਦਾ ਹੁਕਮ ਤੇ ਤੇਰੇ ਹੂਬ ਦੇ ਖਿਲਾਫ ਤਾਂ ਕੁਝ ਹੋਈ ਨਹੀਂ ਦਿੱਸਦਾ ਭਗਵਾਨ ਖਿਸ਼ਾ ਕਰਦਾ ਹੈ ਸਾਡੀ ਹੁਕਮ ਆਮਕਾਰ ਹੈ ਜੋ ਕਰਦਾ ਹਮਾਰੇ ਰਾਮਕਾਰ ਦੁੱਖ ਲੱਗੇ ਨਾ ਪਾਈ ਰੱਖਿਆ ਕਰਨ ਵਾਲੀ ਚੀਜ਼ ਨੂੰ ਰਖਵੀਂ ਹੁਕਮ ਰੱਖ ਦਾ ਅਰਥ ਹੈ ਰੱਖਿਆ ਕਰਨ ਵਾਲੀ ਵਸਤੂ ਜਿਵੇਂ ਦੀ ਦੀਵਾਰ ਕਰ ਲਈ ਰੱਖ ਹੈ ਸਾਡੇ ਹਾਂਜੀ ਹਾਂਜੀ ਕੀਤੀਨ ਆਪਣੀ ਰੱਖ ਗਰੀਬ ਨਿਵਾਜ ਥਾਪ ਤੇ ਜਿਹੜੇ ਬਹੁਤ ਗਰੀਬ ਤੇ ਦਿਵਾਜ ਤੇ ਹੋ ਥਾਪ ਤੇ ਗੁਜਰਾ ਸਾਰੇ ਗਰੀਬ ਨੇ ਔਰ ਚਲੋ ਆਪਾਂ ਦੁਸਾਰ ਲਾਈ ਨਾਲ ਚ ਭੰਨਾ ਸੀ ਜੱਟ ਸਾਰੇ ਭਗਤ ਲੇਖ ਲਓ ਜਿਆਦਾ ਗਰੀਬ ਰਵਦਾਸ ਸੀ ਰਿਵਤਨ ਨਾ ਉਹਦੀ ਮਰਜ਼ੀ ਸੀ ਜਿਹਦੇ ਤਾਂ ਬਣ ਤਾਰੂ ਗੋਰਾ ਰਾਮ ਗੋਰਾ ਰੂੜੀ ਦੇ ਦਾ ਉਹਦਾ ਪਹਿਲਾ ਘਟਿਆ ਗਿਆਨ ਵੇਚੀ ਜਾਂਦੇ ਨੇ ਉਹ ਪੱਥਰ ਦੇ ਨੇ ਨਾ ਨੂੰ ਹੀ ਜਾਂਦੇ ਭਾਅ ਵੇਚੀ ਜਾਂਦੇ ਨੇ ਉਹਨਾਂ ਨੂੰ ਅਸਲੀ ਹੀਰੇ ਦੇ ਕੇ ਠੀਕ ਹੈ ਹੀਰੇ ਵੇਚੀ ਜਾਂਦੇ ਨੇ ਉਹ ਤਾਂ वंदन सगल काप आपै लेन जिदाए वंदन सगल का आपै शिड़ा सारे वंदन आपै कटदल ते कटड़ू निकी लागदा वंदन होनु हुकम है हुकम하이 वदल गए ओदा हुकम दा भूके है हां जी अतिशन जी आस पुन्नी मन संतोष تراਪ वड्डी हु वड्डा खसम जित लेप पाप तृष्णा बुझे तृष्णा बुझ गई हां जी आस पुनी आशा आशा पूरी होगी आशा यही जी तृष्णा बुझ बुझ जावे ए आशा पूरी होगी तृष्णा बुझ गई वंश संतोष श्राप वंश संतोष ना जिया श्राप ਜਿਸੇ ਲੇਪ ਨੂੰ ਦੁਪਾਪ ਜਿਸੇ ਨੂੰ ਕੋਨ ਪਾਪ ਦਾ ਲੇਪ ਲੀ ਇਹ ਕੌਣ ਦੀ ਹੈ ਹੈ ਜੀ ਸੱਚ ਹੈ ਜੀ ਵੱਡਾ ਠੀਕ ਹੈ ਵੱਡੀ ਹੂ ਅਪਾਰ ਜੀ ਮੂਲੀ ਗੱਲ ਹੈ ਜੀ ਅਪਾਰ ਤਾਂ ਕਿਹੜਾ ਕਦੇ ਭਰੇ ਹੈ ਕਿਹੜਾ ਪਤਾ ਡੇਟ ਆਫ ਬਰਥ ਦਾ ਕਿਸੇ ਨੂੰ ਹਾਂ ਆਤਮਾ ਦੀ ਡੇਟ ਆਫ ਬਰਥ ਦਾ ਕਿਸੇ ਨੂੰ ਨਹੀਂ ਪਤਾ ਬਾਹਰ ਹੈ ਹਾਂ ਜੀ